ਸ਼ਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਟੜਿਆਂ ਸਿਉ ਤੋੜ ਢੂਂਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿੱਚ ਵਿਛੜੈ ਨਾ ਜਾਹੀਂ ਛੋੜ ਆ ਨਾਨਕ ਕੱਟੜਿਆਂ ਸਿਉ ਤੋੜ ਕਿ ਕਹਿੰਦੇ ਕੱਟੇ ਨੇ ਕੱਟੀਆਂ ਬੰਲਾ ਕਰਦੇ ਕਿ ਬਾਣੀ ਦੀ ਜਾਣ ਗੁਰਬਾਣੀ ਦੀ ਸੋਚੀ ਗਈ ਹੈ ਪੱਕੀ ਔਰ ਕੱਟੀ ਬਾਣੀ ਦੀ ਜਿਹਨੂੰ ਫਰਕ ਦਾ ਪਤਾ ਵੀ ਉਹਨਾਂ ਨੂੰ ਤੋੜ ਲੈ ਉਹਨਾਂ ਦੀ ਸੋਗਤ ਛੱਡ ਦੇ ਤਿਆਗ ਦੇ ਤੂੜ ਸੱਜਣ ਸੰਤ ਪੱਕਿਆਂ ਪੱਕੇ ਨੂੰ ਢੂੜ ਜੀ ਨੂੰ ਪੱਕੀ ਔਰ ਕੱਚੀ ਬਾਂਧੀ ਦਾ ਅੰਤਰ ਦਾ ਪਤਾ ਹੈ ਉਹ ਅਲੱਗ ਨਾਲ ਕੋਈ ਸੱਜਣ ਹੈ ਸਲਤੈ ਸਾ ਪੱਕੇ ਬਥੇਰੇ ਨੇ ਬਰਬਗਾਦੀ ਤੋਂ ਹੁਣ ਵਾਲੇ ਬਥੇਰੇ ਨੇ ਕੱਚੇ ਨੇ ਉਹ ਜਿਹੜੇ ਪੱਕੇ ਨੇ ਉਹ ਦਾਸ ਕਹਉਂਦੇ ਨੇ ਨਿਖਾਨੀ ਹੁੰਦੀਆਂ ਉਹਨਾਂ ਦੀ ਨਾ ਗੁਰੂ ਕੌਣ ਨਾ ਸੰਤ ਕੌਣ ਨਾ ਸਾਧਕ ਕੌਣ ਨਾ 108 ਕੌਣ ਨਾ ਦਾਸ 8 ਕੌਣ ਉਹ 2ਵੇਂ ਤੋਂ 2ਵੇਂ ਕਹਉਂਦੇ ਤੇ ਦਾਸ। ਤਾਂ ਦਾਸ ਹੀ ਨੇ ਹੁੰਦਾ। ਦੂਏ ਦੀ ਕਹਉਂਦੇ ਹਕਾਰੀ ਹੁੰਦੇ ਨੇ। ਕੱਚੇ ਪੱਕੇ ਦੀ ਨਿਸ਼ਾਨੀ ਹੈ। ਕੱਚੇ ਜਿਹੜੇ ਜਾਂਦੇ ਨੇ ਕਾਰ ਵੱਲ ਨੂੰ ਉੱਚੇ ਚੜਦੇ ਨੇ ਉੱਚੇ। ਮਾਇਆ ਨਾਲ ਜੁੜੇ ਮਾਇਆ ਧਾਰੀ ਦੇ ਜਿਹੜੇ ਦਾਸ ਨੇ ਉਹ ਮਾਇਆ ਤੋਂ ਦੂਰ ਰਹਿੰਦੇ ਨੇ। ਉਹ ਮਾਇਆ ਵਿੱਚ ਉਦਾਸੀ ਰਹਿੰਦੇ ਨੇ। ਉਹ ਜਿਵਨ ਦੇ ਉਹ ਜਿਉਂਦੇ ਹੀ ਵਿਛੜ ਜਾਂਦੇ ਨੇ ਤਾਂ ਓਏ ਮੂਆ ਨਾਲ ਜਾਣੇ ਛੋੜੋ ਭਰੇ ਨੂੰ ਬੁਢੀ ਛੱਡ ਕੇ ਜਾਂਦੇ ਪੱਕੇ ਜਿਹੜੇ ਨੇ ਜਾਣੇ ਹੀ ਨਹੀਂ ਉਹ ਨਹੀਂ ਕਿਤੇ ਪੱਕੇ ਨੇ ਜਾਣਾ ਹੀ ਆ ਉਹ ਆਤਮਾ ਨਾਲ ਜਿਹੜੇ ਹੁੰਦੇ ਨੇ ਉਹ ਸਰੀਰ ਕਰਕੇ ਜੁੜੇ ਹੁੰਦੇ ਨੇ ਸਰੀਰ ਕਰਕੇ ਜਿਉਂਦੇ ਵੀ ਉਹ ਇੰਗਲੈਂਡ ਚ ਗਿਆ ਹੋਏ ਇੱਥੇ ਰਹਿ ਕੇ ਉਹ ਇੰਗਲੈਂਡ ਗਿਆ ਮਰਨ ਉਹ ਸਰੀਰ ਕਰਕੇ ਕੱਲ ਵੀ ਉਲਟਾ ਸੰਤ ਚਲੇ ਗਏ ਗਏ ਛੱਡ ਕੇ ਨਾ ਫਿਰ ਇਹ ਸੋਹੇ ਤੇ ਇੱਥੇ ਲੇ ਛੱਡ ਗਏ ਉੱਥੋਂ ਆਏ ਤੋਂ ਥੇਰੇ ਵੀ ਛੱਡੇ ਆਏ ਉਹਨਾਂ ਕੰਮ ਓਏ ਜੀਵਨ ਦੇ ਵਿਛੜੇ ਓਏ ਮੋਇਆਂ ਨਾ ਜਾਹੀਂ ਛੋੜ ਉਹਦਾ ਜਿਉਂਦੇ ਵਿਛੜੇ ਹੋਏ ਨੇ ਆਪਣੇ ਮੂਰ ਨਾਲੇ ਦੀ ਮਿਲੇ ਹੋਏ ਹੋਰ ਉਹਦੇ ਕੀਦੇ ਨੂੰ ਮਿਲਣ ਨਾਨਕ ਸੰਗਮੀ ਪਰੀ ਨਾਨਕ ਬਿਜਲੀਆਂ ਚੱਕਣਾ ਕਹਿੰਦੇ ਜਦ ਬਿਜਲੀ ਚਮਕਦੀ ਹੈ ਨਾ ਚਾਲਣ ਹੁੰਦਾ ਹੈ ਕੋਲੋਂ ਇਕੱਟਾ ਕਾਲੀਆਂ ਘਟਾਵੋ ਵੀ ਬਦਲ ਵੀ ਗਰਜਦੇ ਇਹ ਰੇਗਾ ਵੀ ਫਿਰ ਚੜਦਾ ਹੈ ਬਰਸਣ ਵਾਸਤੇ ਬਰਸਣ ਫਿਰ ਅਪਾਰ ਹੋ ਕੇ ਬੇਗ ਵਰ੍ਹਦਾ ਫਿਰ ਜਾਣ ਆਉਂਦੀ ਹੈ ਦੇਖੋ ਭਾਈ ਜਾਣ ਆਈ ਆਂਧੀ ਜਾਣਕਾ ਸੰਗਤ ਦੇ ਪਰੀ ਤੁਹੰਦੀਆਂ ਕਾਣ ਜਿਹੜੀ ਇੱਕਵਾਂ ਦੇ ਕਿਤੇ ਤੋਂ ਦੀਆਂ ਆਪਣੇ ਤੇਰੇ ਨਾਲ ਜੁੜੀ ਹੋਉਂਦੀਆਂ ਨੇ ਜਿਹੜੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਉਹਦੇ ਅੰਦਰ ਇਹ ਮਨੂਦ ਅਸ਼ਾਉਦੀ ਹੁੰਦੀ ਠੀਕ ਹੈ ਜੀ ਬਿਜਲੀ ਚਮਕਣ ਦਾ ਭਾਵ ਕੀ ਅੰਦਰ ਚਾਨਣਾ ਪ੍ਰਕਾ ਹੋਣਾ ਹੈ ਜੀ ਹਜੋ ਜੋ ਆਪਾਂ ਨੂੰ ਸਮਝ ਆਉਂਦੀ ਹੈ ਇਹਦੇ ਕੋਈ ਸ਼ਬਦ ਵਿਚਾਰ ਤੋਂ ਬਿਜਲੀ ਕੋਈ ਚਾਨਣ ਚਮਕੀ ਆਉਂਦੀ ਆ ਠੀਕ ਹੈ ਜੀ ਮਹੱਲਾ ਪੰਜਵਾਂ ਜਲ ਥਲ ਨੀਰੀ ਭਰੇ ਸੀਤਲ ਪਵਨ ਝੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜਨ ਦੀਆਂ ਜਲ ਥਲ ਨੀਰ ਭਰੇ ਜਦ ਵਰਸਿਆ ਬੇਗਾ ਜਦ ਛਾਵਣ ਆਇਆ ਛਾਵਣ ਦੀ ਸਰਸੀ ਕਾਂਗੜੀ ਸਾਰੇ ਭਰ ਗਏ ਉੱਚੀ ਦੀ ਵੇ ਜਦ ਪਰਮ ਗਿਆਨ ਆਤਮ ਜਿਨ੍ਹਾਂ ਕੋਲ ਥੋੜੀ ਕਮੀ ਤੀ ਫਟਾਫਟ ਭਰ ਕੇ ਜਿਨ੍ਹਾਂ ਕੋਲ ਥੋੜਾ-ਬੋਤਾ ਵੀ ਨੀਮਤ ਹੁੰਦੀ ਪਾਣੀ ਖੜ ਗਿਆ ਉਹ ਗੱਲੇ ਹੁਣ ਬਣੀਏ ਖਾਲੀ ਸੀ ਝਾਲ ਵੀ ਥਲ ਨਾ ਭਰ ਕੇ ਜਬਰ ਸਾਰੀ ਜਗ੍ਹਾ ਸੱਚ ਪ੍ਰਗਟ ਹੋ ਗਿਆ ਸੀਤਲ ਪਵਨ ਝੁਲਾਰ ਦੇ ਸਾਦੇ ਪਾਸੇ ਠੰਡੀ ਹਵਾ ਆਉਣ ਲੱਗੀ ਉਹ ਜਿਹੜੇ ਨਾਲੇ ਲੱਗਦੇ ਤੇ ਨਾ ਆਪਾ ਵਿਰੋਧੀ ਧਰਮਾਂ ਦੇ ਰਾਜ ਕਰੇਗਾ ਖਾਲਸਾ ਉਹ ਉਹ ਸਭ ਬਰਦੋਗੇ ਉਹਨਾਂ ਨੂੰ ਚੜਾਉਣ ਵਾਸਤੇ ਕਰਦੇ ਤੇ ਉਹ ਤਾਂ ਜੱਜਾ ਮਹਾਂ ਦੇ ਉਹਨੂੰ ਚੜਾਉਣ ਵਾਸਤੇ ਕਰਦੇ ਤੇ ਸਭ ਬਰਦ ਹੋ ਗਏ ਸਭ ਘੁਰਤੇ ਸਾਖ ਨੇ ਸੱਚ ਦੀ ਗੱਲ ਕਰੋ ਲੋਕਾਂ ਨੂੰ 파ੜੋ ਨਾ ਮਰਵਾਓ ਨਾ ਧਰਮ ਇੱਕੋ ਹੀ ਹੈ ਦਾ ਦੋ ਧਰਮ ਹੁੰਦੇ ਹੀ ਨਹੀਂ ਜਿਹੜਾ ਦੂਆ ਸਾਬਤ ਕਰੋ ਆਓ ਆਓ ਦੂਆ ਸਾਬਤ ਕਰੋ ਪਿਤਾ ਇੱਕ ਘਰ ਵਾਰ ਤੇ ਝਗੜਾ ਕਿਹੜੀ ਗੱਲ ਦਾ ਕਹੋ ਜੀ ਸੋ ਇਹਨੂੰ ਜਿਹੜੇ ਲਾਲ ਜਨਨ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਦੇ ਨਾ ਹੀਰੇ ਲਾਲ ਜੜੇ ਹੋਏ ਨੇ ਉਹ ਆਨੰਦ ਦਾ ਆਪਣੇ ਹਿਰਦੇ ਤੇ ਸੁਤੀਲ ਦੇ ਆਰਾਮ ਕਰਦੇ ਹੁੰਦੇ ਰਸਤ ਕਰਦੇ ਹੁੰਦੇ ਉਹਨਾਂ ਦੀ ਭਜਨਤ ਖਤਮ ਉਹਨਾਂ ਨੂੰ ਨਾ ਜਾਣ ਦੀ ਕੋਈ ਲੋੜ ਨਹੀਂ ਉਹਨਾਂ ਕੋ ਤਾਂ ਰਾਜ ਹੈਗਾ ਉਹ ਤਾਂ ਆਪਣਾ ਰਾਜ ਹੈ ਉਹਨਾਂ ਕੋਲ ਤਾਂ ਉਹ ਤਾਂ ਰੌਲਾ ਉਹਨਾਂ ਨੇ ਪਾਉਣਾ ਜਿਹਨਾਂ ਨੇ ਮਾਇਆ ਰਾਜ ਦੀ ਭੁੱਖ ਹੈ ਜਿਹੜੂ ਗੁਰਬਾਣੀ ਦੀ ਇੱਕ ਪੰਕਤੀ ਤੇ ਪਹਿਲਾਂ ਵੀ ਦੇ ਇੱਕ ਪੰਕਤੀ ਦੇ ਅਰਥਾਂ ਦਾ ਵੀ ਪਤਾ ਪਹਿਲਾਂ ਖਾਕ ਦੇਣਾ ਇਹਨਾਂ ਨੇ ਅਰਥਾਂ ਦੀ ਇੱਕ ਪੰਕਤੀ ਦਾ ਪਤਾ ਲਿਏ ਸੱਚੇ ਸੂਢ ਵੀ ਲੜ ਬਿਚੂ ਲੜ ਜੂਗ ਸੱਚ ਸੁਣ ਕਹਿੰਦਾ ਬਿਚੂ ਲੜ ਜੂ ਠੀਕ ਹੈ ਉਹ ਗੁਣੇ ਫਿਰਦੇ ਹੋਰ ਕੀ ਗੱਲ ਸੁਪਰ ਕੱਪੜ ਪੋਗ ਨਾਨਕ ਪਰੀ ਵੀ ਹੋਣੀ ਆ ਜਿਹੜੇ ਕੱਪੜੇ ਦੇ ਬਾਹਲੇ ਪੋਗ ਪਦਾਰਥ ਦੇ ਇਹਦਾ ਪਰੀ ਬਹੂੜੀਓ ਦੇ ਜਿਹੜੀ ਉਹਨਾਂ ਦੇ ਆੜੇ ਕਪੜੇ ਪਾਲੇ ਰੰਗ ਬਰੰਗੇ ਚੰਗੇ ਬਹੁਤ ਕੀਮਤੀ ਪਾਲੇ ਤੇਨੇ ਚੁੱਕੇ ਖੜੀ ਖਾਲੇ सोई है करना जे सो धावे प्राणियां पावे तुर लहना काल कटते जोगिया सोई है करना जेड़ा कारण करते बनाता ते बनातानु भी तहां कर लो ओही तेनु कर लो पढे भाई ओथे राह जाना पढे जेड़ा लाउने लिखता तेरे वास्ते जो है हुक्म करता ओही कर लो पढे जे सो धावे प्राणियां पावे तू जिन्न बिरजी शाला मालला जिन्न बिरजी जोर लाला ਪਾਵੇਂ ਤੋਂ ਲੈਣਾ ਜੋ ਤੁਰੂ ਜੋ ਉਹਨੇ ਲਿਰਤਾ ਉਹੀ ਪ੍ਰਾਪਤੀ ਹੈ ਉਸ ਤੋਂ ਜ਼ਿਆਦਾ ਤੈਨੂੰ ਪ੍ਰਾਪਤੀ ਸਿਆ ਘੱਟ ਪ੍ਰਾਪਤੀ ਨਹੀਂ ਹੋ ਸਕਦੀ। ਹੋਜੀ ਬਿਨ ਕਰਮਾ ਕਿਛੂ ਨਾ ਲੱਭਈ ਜੇ ਫਿਰੈ ਸਭ ਧਰਨਾ ਗੁਰ ਮਿਲ ਗੋਬਿੰਦ ਕਾ ਭੈ ਡਰ ਦੂਰ ਕਰਣਾ ਬਿਨ ਕਰਮਾ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਕਛੂ ਨੂੰ ਲੱਭੀ ਉਹਦੀ ਕਿਰਪਾ ਬਿਨਾਂ ਰਜ਼ਾ ਬਿਨਾਂ ਕੁਛ ਨਹੀਂ ਲੱਭਣਾ ਤੇ ਤੋਬੀ ਫੰਦਾ ਸਾਰੀ ਧਰਤੀ ਧਾਲ ਨਾ ਫਿਰ ਪੱਜਿਆ ਫਿਰ ਸਾਡੀ ਧਰਤੀ ਤੇ ਜੋਰ ਲਿਖਤਾ ਉਹੀ ਲੱਗਣਾ ਤੂਫਾਨ ਤੋਂ ਦੀ ਲੱਭ ਸਕਦਾ ਗੁਰਮਿਲ ਪਾਉ ਗੋਬਿੰਦ ਕਾ ਐ ਦਰ ਦੂਰ ਕਰ ਲੇ ਜਗਿਆਨ ਬੜ ਜਵੇਣਾ ਫਿਰ ਗੋਬਿੰਦ ਦੀ ਭੁੱਖ ਅੰਦਰ ਪੈਦਾ ਹੋ ਜਾਂਦੀ ਉਹਦੇ ਪਾਣੀ ਦੀ ਭੁੱਖ ਪੈਦਾ ਹੋ ਜਾਂਦੀ ਹੈ ਬਸ ਉਹਦੇ ਪਾਣੀ ਦੀ ਭੁੱਖ ਪੈਦਾ ਹੋਈ ਪਾਣੀ ਚੱਲਣ ਦੀ ਭੁੱਖ ਪੈਦਾ ਹੋਈ ਦੁਨਿਆਵੀ ਸਾਰੇ ਟਰ ਦੂਰ ਹੋ ਜਾਂਦੇ ਦੁਨਿਆਵੀ ਦਲ ਦੂਰ ਕਰਨ ਦਾ ਕੋਈ ਤਰੀਕਾ ਹੈ ਗਿਆਨ ਲਗੋ ਗੁਰਬਾਣੀ ਦਾ ਭਗਵਾਨ ਦੀ ਭੈਜ ਰਹੁ ਸੱਚ ਦੀ ਭੈਜ ਰਹੁ ਸਤਗੁਰ ਦੀ ਭੈਜ ਰਹੁ ਗੁਰਬਾਣੀ ਦੀ ਭੈਜ ਰਹੁ ਗੁਰਬਾਣੀ ਉਤਸਾਰ ਜੀ ਨੂੰ ਵਕੀਫ ਕਰੋ ਫੇਰ ਕੋਈ ਡਰਦੀ ਤੁਹਾਨੂੰ ਬਾਤ ਠੀਕ ਹੈ ਗੋਬਿੰਦ ਮੂਲ ਜੀ ਹਾਂ ਬੋਲੋ ਠੀਕ ਹੈ ਗਿਆਨ ਦੇ ਨਾਲ ਗੋਬਿੰਦ ਨਾਲ ਪ੍ਰੇਮ ਰੱਖੋ ਆਪਣਾ ਮਨ ਔਰ ਚਿੱਤ ਦਾ ਹਾਂ ਜੀ ਹਾਂ ਨਾਲ ਪ੍ਰੇਮ ਕਰੋ ਕਹਾਦਾ ਗੋਬਿੰਦ ਜੀ ਰਜਾ ਨਾ ਕੋਈ ਡਰੇ ਹੈ ਭੈ ਤੇ ਬੈਰਾਗ ਉਪਜੈ ਹਰ ਫਿਰ ਜਨਮ ਨਾ ਉਹ ਬੈਰਾਗ ਪੈਦਾ ਹੋ ਪੈ ਤੇ ਬੈਰਾਗ ਉਪਜੈ ਸਤਗੁਰ ਦੇ ਭੈ ਤੇ ਗੋਬਿੰਦ ਦੇ ਪੈ ਪਾੜੀ ਚੱਲਣ ਨਾਲ ਭੈ ਜਿਹ ਬੈਰਾਗ ਪੈਦਾ ਹੋ ਬੈਰਾਗ ਦਾ ਮਤਲਬ ਸੰਸਾਰ ਛੁੱਟ ਜੂ ਆਪੇ ਅੱਪੇ ਤ੍ਰਿਸ਼ਨਾ ਜਿਹੜੀ ਦੀ ਅਗਨ ਲੱਪੇ ਬੁੱਝੂਗੀ ਦੁਨੀਆ ਵੀ ਚਾਹ ਪੀ ਛੱਡ ਜਾਂਦੀ ਵੀ ਆ ਮਨ ਆਪੇ ਟਿਕ ਜੂਗਾ ਉਪਜਾ ਹਰ ਖੋਜ ਖੋਜ ਤ ਫਿਰ ਫਿਰ ਕੀ ਕਰੂਗਾ ਫਿਰ ਹਾਲ ਨੂੰ ਖੋਜੂਗਾ ਹੋਰ ਕੰਮ ਦੀ ਕੋਈ ਨਹੀਂ ਰਹੇ ਜਨ ਫਿਰ ਆਪਣੇ ਮੂਲ ਦੀ ਖੋਜ ਲੱਗ ਜੂਗਾ ਖੋਜ ਤ ਖੋਜ ਤ ਸਹਿਜ ਉਪਜਾ ਦਾ ਖੋਜਣ ਲੱਗ ਜੂਗਾ ਜੋ ਜੋ ਖੋਜਦਾ ਚਲਾ ਜਾਊਗਾ ਉਹ ਟਿਕਦਾ ਚਲਾ ਜਾਊਗਾ ਸਹਿਜ ਉਪਜਾ ਸਹਿਜ ਫਾਇਦਾ ਹੋਊਗਾ फिर ਜੰਦੂ ਬਲ ਬਾਲੋ ਬਸ ਆਜੋ ਗਿਆ ਜੰਦੂ ਬਲ ਕਟਿਆ ਤਾਂ ਆ ਦੋ ਪੰਕਤੀਆਂ ਦੇ ਵਿੱਚ ਸਾਰੀ ਗੱਲ ਦੱਸਤੀ ਕਿ ਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ ਬੋਇਥ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਪੌਜਲ ਤਰਣਾ ਕਿ ਆਏ ਹਿਰਦੇ ਦੇ ਵਿੱਚ ਕਮਾਏ ਸਮਾਈ ਤਾਂ ਲੇ ਪਾਇਆ ਸਾਧ ਸੰਨ ਸਾਧ ਸੰਨ ਚੋਂ ਪ੍ਰਾਪਤੀ ਹੈ ਸਭ ਕੁਝ ਸਾਧ ਕਿਥੇ ਹੈ ਸਾਧ ਸਰਦੇ ਚ ਅੰਦਰ ਹੈ ਸਾਧ ਤਾਂ ਉਹ ਹੈ ਤਾਂ ਨਾਨਕ ਦਿਓ ਨਾਨਕ ਕਹਿੰਦਾ ਦਿਓ ਜਿਹੜਾ ਅੰਤਰ ਗੁਰ ਹੈ ਜਿਸ ਹਰ ਚੜਾਏ ਇਸ ਪੌਜਲ ਤਰਨ ਆਪਣੇ ਜਹਾਜ਼ ਚ ਆਪਣੇ ਹੁਕਮ ਚ ਆਪਣੇ ਲੋਬ ਨਾਲ ਆਪਣੇ ਜਾਸਰ ਨੂੰ ਜੋੜ ਲਵੇ ਉਹ ਪੌਛਲ ਤਰ ਜਾਂਦਾ ਠੀਕ ਹੈ ਜੀ ਇੱਥੇ 22ਵੀਂ ਪੌੜੀ ਸਮਾਪਤੀ ਹੈ ਜੀ